सलोक महल्ला तीजा बिन नाम है सब धर्म दे नित जग टोटा संसार मनमुख कर्म कमावणे हम में अंध गुवार कणवावे सब धर्म दे ते फिरो जडिया वे बतरू तंत्रन रे करी फिरदे ने सारे धर्म चले जे लोभ है ओकमी सब पर तुरे सकदे ਵੇਰ ਰਵੇ ਸੱਪਰਬ ਦੇ ਉਹ ਪਰਮਾਤਮਾ ਨੂੰ ਵੀ ਅਸੀਂ ਭਗਤੀ ਕਰਦੇ ਆ ਭਗਤੀ-ਕੁਕਤੀ ਕੋਈ ਨਹੀਂ ਹੋ ਰਹੀ ਉਹਨਾਂ ਦੀ ਇਹ ਹੋ ਵੀ ਰਹੀ ਆ ਅਸੀਂ ਕਰਦੇ ਆ ਇਹ ਕਹਿ ਰਹੇ ਨੇ ਪਰਮ ਦੇ ਬਾਲਾ ਫੇਰ ਕੋਈ ਸਮੂਹੀ ਲੋਨਦਾ ਚਾਹੇ ਕੁਝ ਵੀ ਕੋਈ ਕਰਦਾ ਉਹ ਭਗਤੀ ਨਹੀਂ ਹੈ ਦਰਗਾਹ ਦੇ ਪ੍ਰਵਾਨ ਭਗਤੀ ਨਹੀਂ ਐ ਹਾਂ ਸਾਰੀ ਆਦਮੀ ਦੀ ਬੰਦੀ ਹੁਈ ਭਗਤੀ ਅਸੀਂ ਤਾਂ ਉਹਨੂੰ ਭਗਤੀ ਬਦਲੀਏ ਪਰ ਦਰਗਾਹ ਦੇ ਪ੍ਰਵਾਨ ਨਹੀਂ ਐ ਭਗਤੀ ਕਿਉਂ ਉਹਦਾ ਬੇਸ ਬਸਤੀ ਦਾ ਰਿਤਿ ਸਦਿਆ ਆਇਆ ਵਾਇਆ ਇਹ ਹੋਰ ਕੁਛ ਨਹੀਂ ਹੈ ਇੱਛਾ ਉਹਦੇ ਚ ਮਾਇਆ ਦੀ ਹੋਈ ਹੈ ਬੜਾ ਵੱਣ ਦੀ ਇੱਛਾ ਹੋ ਸਕਦੀ ਹੈ ਵਾਇਆ ਦੀ ਇੱਛਾ ਹੋ ਸਕਦੀ ਹੈ ਇੱਛਾ ਰਹੀ ਤਿਆਗ ਦੀ ਇੱਛਾ ਰਹੀ ਹੈ ਬਿਨਾਂ ਵੇਸ ਦੇ ਇਹ ਨਿੱਤ ਜਗ ਟੋਟਾ ਸੰਸਾਰ ਆਨ ਵਿੱਚ ਜਗ ਦੇ ਵਿੱਚ ਟੋਟਾ ਹੀ ਰਹਣਾ ਹੈ ਉਹਨਾਂ ਦੀ ਦੀਵਾਨ ਸੰਸਾਰ ਸਾਡੇ ਵੀ ਰੋਜ਼ ਸੰਸਾਰੀ ਜਵਨਦਾਈ ਤੇ ਛੇਤੀ ਅਰਦਾਸ ਕਰਦੇ ਨੇ ਅਰਦਾਸ ਕਰਦੇ ਆ ਉਹੀ ਗੱਲ ਪਾਇਆ ਸੀ ਸਭ ਕੁਝ ਕਰਕੇ ਅਰਦਾਸ ਇਹ ਤਾਂ ਉਹਦਾ ਹੋਰ ਕੁਝ ਨਹੀਂ ਚਾਹੁੰਦੇ ਇਹ ਦੁਗਾਂ ਨਹੀਂ ਕੋਈ ਚਾਹੁੰਦਾ ਉਹ ਫਿਰ ਕੋਈ ਵਿਰਲਾ ਹੁੰਦਾ ਗੁਰਮੁਖ ਉਹ ਜਿਹੜਾ ਉਹ ਭਾਵ ਕਿ ਜਦੋਂ ਤੱਕ ਅੰਦਰ ਸੰਤੋਖ ਨਹੀਂ ਪੈਦਾ ਹੋਇਆ ਜਦ ਤੱਕ ਟੁੱਟਾ ਰਹਿਣਾ ਹੀ ਸੰਸਾਰ ਚ ਬਿਲਕੁਲ ਬਿਲਕੁਲ ਬਿਲਕੁਲ ਮਾਇਆ ਦੀ ਭੁੱਖਾ ਜਿਹੜਾ ਟੋਟਾ ਹੀ ਹੈ ਗੁਰਮਤੀ ਭਗਤੀ ਜੀ ਇਹ ਸੰਤੋਖ ਪੈਦਾ ਕਰਦੀ ਬਿਲਕੁਲ ਬਿਲਕੁਲ ਮਨਮੁਖੀ ਕਰਮ ਕਮਾਵਣੇ ਹਉਮੈ ਅੰਧ ਗੁਬਾਰ ਉਹ ਕਰਮਦਾਰੂ ਨੇ ਫਿਰ ਮੁਖ ਖਾਣੇ ਦੇ ਨੂੰ ਸਮਝਣ ਫਿਰ ਇਹਨੂੰ ਮਨ ਤਾਂ ਗੁਰਬਖਾਲੇ ਕਬ ਕਰ ਜੋ ਵੀ ਕੁਝ ਹੋ ਰਿਹਾ ਹੈ ਗੁਰਮਤ ਹੋ ਰਿਹਾ ਹੈ ਵੀ ਗੁੱਤਾਂ ਦੇ ਗੁਰਮੁਖੀ ਕਰਮ ਕਮ ਕਮ ਉਹ ਲਈ ਉਹ ਤਾਂ ਗੁਰਮਤਿ ਨੂੰ ਸਮਝੇ ਤੇ ਬਿਨਾਂ ਕੰਮੇ ਕੋ ਗੱਲ ਹੋਗਾ। ਤੈਨੇ ਤੁਰੇ ਫਿਰਦੇ ਨੇ ਸਾਰੇ ਅੰਦਗਵਾਰ। ਗੁਰਮੁਖੀ ਅੰਮ੍ਰਿਤ ਪੀਵਣਾ, ਮਾਨਕ ਸ਼ਬਦ ਵਿਚਾਰ। ਹੁਣ ਅੰਮ੍ਰਿਤ ਜਿਹੜਾ ਪੀਵਣਾ ਦੇ, ਗੁਰਮਖਾਲਾ ਵਰਤਾ ਸ਼ਬਦ ਵਿਚਾਰ ਚੋਂ ਪੀਤਾ ਜਾਊਗਾ। ਗੁਰਮੁਖਾਂ ਨੇ ਕਿਹਾ ਅੰਮ੍ਰਿਤ ਪੀਵਣਾ ਸ਼ਬਦ ਵਿਚਾਰ ਚੋਂ ਗੁਰਬਾਣੀ ਚੋਂ ਇੱਕ ਅੰਮ੍ਰਿਤ ਨਾਮ ਹੈ ਗੁਰਸਤੁਰ ਦੀ ਆਭਜਾਈ ਦੀ ਨਾਮ ਹੈ ਅੰਮ੍ਰਿਤ ਦਾ। ਇਹ ਨਾਮ ਤੇ ਬਿਰੋ ਉਬਰਤ ਜੋ ਗੁਰਬਾਨੀ ਨੂੰ ਵਿਚਾਰਨਾ ਇਹ ਚੋ ਹੀ ਉਮਰਤ ਨੂੰ ਬਿੜਨਾ ਅਸਾਂ ਜਿਹੜੀ ਪਹੁੰਚ ਲੈਨੇ ਉਹਨੂੰ ਉਬਰਤ ਕਹਿ ਕੇ ਪਹੁੰਚ ਨੂੰ ਉਬਰਤ ਆ ਜਿਹੜੀ ਭਗਤੀ ਹੈ ਸਾਡੀ ਉਸ ਜੋ ਅਸੀਂ ਧਾਰਨਾ ਬਣਾਈ ਹੋਈ ਹੈ ਖਿਲਾਫ ਹੈ ਇਹ ਭਗਤੀ ਉਬਰਤ ਸਭ ਕੁਝ ਛਰਾਰਤੀ ਬੰਦੇ ਨੇ ਕਰ ਲਿਆ ਵਸ ਉਹਨਾਂ ਨੇ ਕਹਾਂ ਦੀ ਆਪ ਜਾਣੂ ਸੀ ਨਾ ਇਹਨਾਂ ਨੂੰ ਜਾਣਦੇ ਨਾ ਸੀ ਹਾਂ ਰੋਕ ਕੇ ਬਹਿ ਗਏ ਹਾਂਜੀ ਪਹਿਲਾਂ ਵੀ ਆਪਾਂ ਨੂੰ ਅੰਮ੍ਰਿਤ ਦੇ ਬਾਰੇ ਆਇਆ ਸੀ ਕਿ ਇਸ ਰਾਗ ਵਿੱਚ ਜਦੋਂ ਅੰਮ੍ਰਿਤ ਦੀ ਗੱਲ ਹੋ ਪਰ ਗੁਰਮਤ ਵਿਚਾਰ ਨੂੰ ਅੰਮ੍ਰਿਤ ਕਿਹਾ ਹੈ ਜੀ ਗੁਰਮਤ ਨਾਮ ਹੈ ਹਾਂ ਅਮਰਤ ਨਾਮ ਗੁਰਮੁਖੀ ਹੰਦਿਨ ਉਸਤਤ ਹੋਵੈ ਦੇਖੋ ਅਵਸਥਾ ਉਹਨੂੰ ਜਾਗਰਤ ਅਵਸਥਾ ਕਹਿੰਦੇ ਨੇ ਅੱਛਾ ਜੇ ਮੋਟਕਿਆ ਹੋਇਆ ਤਾਂ ਜਾਗਿਆ ਹੋਇਆ ਹੈ ਜੇ ਕਿੱਕਿਆਰੀ ਹੋਇਆ ਫਿਰ ਜਾਗਿਆ ਨਹੀਂ ਕਿ ਜਿਆਣੀ ਹੋਇਆ ਤਾਂ ਸੁਪਨਾ ਦੇਖਦਾ ਸੁਪਨਾ ਸੁੱਤਾ ਹੀ ਦੇਖਦਾ ਹੁੰਦਾ ਤੇ ਜੇ ਕਿਹ ਆਇਆ ਤਾਂ ਜਾਗਿਆ ਸੁਪਨਾ ਬੰਦ ਕਰ ਦਿੰਦਾ ਜਾਗੇ ਤੇ ਜਿਹੜੇ ਜਾਗਦਾ ਸੁਪਨਾ ਬੰਦ ਹੋ ਜਾਂਦਾ ਜਿਹੜਾ ਸੁੱਤਾ ਸੁਪਨਾ ਦੇਖਦਾ ਜੀਵਨ ਸਾਰਾ ਸੁਪਨਾ ਸੁਪਨਾ ਮਗਰ ਮਗਰ ਫਿਰ ਸੁਪਨਾ ਦੇਖਦਾ ਹੈ ਜਾਗਿਆ ਹੈ ਨਹੀਂ ਆ ਫਿਰ ਮਾਇਆ ਦੀ ਕਮਾਈ ਕਰ ਨਹੀਂ ਆਇਆ ਸੀ ਇੱਥੇ ਮਾਇਆ ਇੱਥੋਂ ਤਾਂ ਲਾਹਣ ਆਈ ਸੀ ਉਹ ਜਿਹੜਾ ਸੀ ਨਾਲ ਲੈ ਕੇ ਜਾਈਏ ਭਾਇਰੀ ਜਾਣੀ ਹੈ ਉਹ ਵੀ ਆਉ ਨੋਬ ਜਾ ਸਕਦਾ ਨਾ ਹੋਰ ਤਾਂ ਕੁਝ ਨਹੀਂ ਜਾ ਸਕਦਾ ਇੱਥੋਂ ਗਿਆਨ ਜੋ ਸਿ ਪ੍ਰਾਪਤ ਕਰ ਲਿਓ ਜਾ ਸਕਦਾ ਹੈ ਗਿਆਨ ਦਾ ਬੰਦਰਮਨ ਹੋ ਜਾਂਦਾ ਹੈ ਨਿਰਮਨ ਮੰਨ ਜਿਨਾ ਹੋ ਗਿਆ ਉਹੀ ਸਾਰੀ ਪ੍ਰਾਪਤੀ ਹੈ ਪਰ ਇੱਥੇ ਇੱਕ ਗੱਲ ਦੱਸੋ ਵੀ ਸਹਜੇ ਜਾਗ ਗਿਆ ਤਾਂ ਠੀਕ ਹੈ ਸਹਜੇ ਸੋਵੇ ਤਾਂ ਕੀ ਭਾਵਨਦਾ ਜਿਹੜਾ ਸਹਿਜ ਅਵਸਥਾ ਦਾ ਜਾਗਿਆ ਸੁੱਤਾ ਕੋਈ ਬਰਾਬਰ ਹੋਵੇ ਸੋਣਾ ਨਹੀਂ ਤੇ ਸੁੱਤਾ ਵੀ ਸਹਿਜ ਚ ਟਿਕਿਆ ਰਹਿੰਦਾ ਹੈ ਜਾਗਦਾ ਵੀ ਟਿਕਿਆ ਰਹਿੰਦਾ ਸੁੱਤੇ ਵੀ ਅੰਦਰ ਵੀ ਉਹਦੇ ਠੀਕ ਹੈ ਜੀ ਗੁਰਮੁਖ ਹੀ ਅੰਦੀਨੁਸਤਤ ਹੋਵੇ ਫਸੇ ਕਰਦਾ ਉਹਦੀ ਬੜੇ ਕੀ ਕਰਦਾ ਉਹ ਆਪ ਨੂੰ ਨੇ ਵਡਾ ਹਾਂਜੀ ਮਨਮੁਖ ਭਰਮੈ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਹੋਵੇ ਮਨਮੁਖਾ ਜਿਹੜਾ ਭਰਮ ਦੇ ਵਿੱਚ ਭੁੱਲਿਆ ਹੁੰਦਾ ਹੈ ਉਹਦੇ ਅੰਦਰ ਹਲਵਾ ਨੂੰ ਤਾਂ ਨੀਂਦ ਵੀ ਨੀਂਦ ਉਹ ਨੀਂਦ ਦਾ ਉਹਦਾ ਟਿਕਾਉ ਨਹੀਂ ਹੈ ਮਨ ਟਿਕਾ ਨਹੀਂ ਜਵਾਨੀ ਜਾਗ ਸਵੇ मानक नाम रत्तियां बल जाऊं और ज्ञानी जेडे जागदे ने ओह और सौदे ने ओना दा स्वभाव है हुंदा बस ओसे वस्ते सुत्ते ने ओसे वस्ते जागें ने ओना दी अवस्था इक रेंदी है बदलदी दी है बुलबुखा दी अवस्था बदलदी है ओ भूल जाते ने सौंद दा मतलब ਗੁਰਮੁਖ ਭੁਲੇ ਦੇ ਦੀਆਂ ਨਾ ਸੁਣਦੇ ਆ ਇਹ ਭੁਲੇ ਦੇ ਨੇ ਨਾ ਜਾਗਦੇ ਭੁਲੇ ਦੇ ਉਹਨਾਂ ਨੂੰ ਸੁਪਨ ਵੀ ਆਉਂਦੇ ਉਹ ਵੀ ਉਹੀ ਆਉਂਦਾ ਉਹ ਨਾਮ ਰੱਤਿਆਂ ਬਲ ਜਾਉ ਕੋਈ ਚੜ ਗਿਆ ਉਹਨਾਂ ਦੇ ਰੰਗ ਜਿਹੜੇ ਰੱਗੇ ਗਏ ਉਹਨੂੰ ਤਾਂ ਬੁਲੇ ਆ ਰਹੀ ਉਸ ਗੁਰਮੁਖ ਦੇ ਉਹੀ ਉਹਨਾਂ ਦੀ ਅਵਸਥਾ ਹੈ ਜਿਹੜੀ ਦਸੀ ਪੌੜੀ ਛੇ ਹਰ ਨਾਮ ਧਿਆਵੇਂ ਜੋ ਹਰ ਰਤਿਆਂ ਹਰ ਇੱਕੋ ਧਿਆਵੇਂ ਇੱਕ ਇੱਕੋ ਹਰ ਸਤਿਆਂ ਉਹਨਾਂ ਨੇ ਜਿਹੜੀ ਪਹਿਲੀ ਅਵਸਥਾ ਦੱਸੀ ਹੈ ਨਾ ਉਹ ਕਹਿੰਦੇ ਜਿਹਨਾਂ ਨਾਮ ਬਦਾਰਨ ਚੜ੍ਹਿਆ ਹੋਇਆ ਹੈ ਉਹੀ ਦੀ ਗੱਲ ਹੈ ਉਹੀ ਉਹਨਾਂ ਦਾ ਧਿਆਨ ਜਾਗਦੇ ਸੁੱਤੇਆਂ ਦਾ ਰਹਿੰਦਾ ਹਾਂ ਉਹੀ ਗੁਰੂ ਕਰਦੇ ਉਹ ਜਾਗਦੇ ਆ ਸੁੱਤੇ ਇੱਕ ਅਵਸਥਾ ਚ ਰਹਿੰਦੇ ਨੇ ਟਿਕੀ ਹੋਈ ਚ ਉਸੇ ਕੀ ਦਿਖਲਾਈ ਹੋਈ ਅਸ਼ੁਧ ਕੀਤੀ ਵੀ ਨਾਮ ਬਦਾਰਨ ਚੜ੍ਹਿਆ ਉਹਨੂੰ ਤਾਂ ਉਹਨਾਂ ਦੀ ਇਹ ਵਸਤਾਂ ਰਹੀਆਂ ਹਰ ਇੱਕ ਤੇ ਆਵੇਂ ਇੱਕ ਉਹ ਆ ਵੀ ਕੋਹ ਤੇ ਜੀਉ ਆਪਣੇ ਆਪ 'ਤੇ ਧਿਆਨ ਹੁੰਦੇ ਨੇ ਉਹ ਅਸਲ ਦੇ ਵਿੱਚ ਜਦ ਆਪ ਇੱਕ ਹੋ ਜਾਂਦਾ ਫਿਰ ਉਹਨੂੰ ਇੱਕ ਦਾ ਗਿਆਨ ਹੁੰਦਾ ਫਿਰ ਉਹ ਆਪਣੇ ਆਪ ਨਾਲੋਂ ਨਹੀਂ ਵਿਛੜਉਂਦਾ ਉਹਨੇ ਬੋਲਦੇ ਹੋਰ ਕੀ ਹੈ ਆਪੇ ਇੱਕ ਹਰ ਇੱਕ ਧਿਆਨ ਇੱਕ ਹੋ ਕੇ ਹੀ ਇੱਕ ਦੇ ਵਿੱਚ ਧਿਆਨ ਲੈ ਸਕਦਾ ਜੇ ਅਗਰ ਆਪ ਇੱਕ ਦੇ ਵਿੱਚ ਧਿਆਨ ਦੀ ਲੈ ਸਕਦਾ ਇੱਕ ਦਾ ਗਿਆਨ ਹੀ ਨਹੀਂ ਹੁੰਦਾ ਇੱਕ ਦਾ ਗਿਆਨ ਇਹਦੀ ਹੁੰਦਾ ਗਿਆਨ ਤੇ ਬਿਨਾ ਧਿਆਨ ਕਿਵੇਂ ਹੋ ਜੂ ਇਸਿਆ ਨੂੰ ਗਿਆਨ ਧਿਆਨ ਕਿਹਾ ਹੈ ਜਦੋਂ ਇੱਕ ਦਾ ਗਿਆਨ ਹੁੰਦਾ ਤਾਂ ਇੱਕ ਧਿਆਨ ਸੇ ਜੁੜਦਾ ਹੈ ਆਤਮ ਧਿਆਨ ਧਾਰੀ ਹੁੰਦਾ ਅਸਲ ਵਿੱਚ ਹੋਣੀ ਕੋਈ ਆਫਤ ਬਹਾਲਦੀ ਹੈ ਇਹ ਆਤਮ ਧਿਆਨ ਧਾਰੀ ਕਹਿੰਦੇ ਕਈ ਕੋਟ ਆਤਮ ਧਿਆਨ ਧਾਰਨ ਆਤਮ ਧਿਆਨ ਧਾਰੀ ਆ ਫਿਰ ਇਹ ਆਪਣੇ ਆਪ ਜੇ ਧਿਆਨ ਹੈ ਦਾ ਔਰ ਇੱਕ ਤੇ ਆਵੇ ਇੱਕ ਇੱਕੋ ਇੱਕੋ ਹਰ ਸਤਿਆ ਭਾਈ ਹਰ ਸਤਿਆ ਹਰ ਇੱਕੋ ਹੋ ਗਿਆ ਸਤ ਸਰੂਪ ਹੋ ਗਿਆ ਉਹ ਬੂਹਰ ਜਿਹੜਾ ਸੀ ਉਹਦਾ ਝੂਠਾ ਹੁੰਦੀ ਰਿਹਾ ਹੁਣ ਸਤ ਸਰੂਪ ਹੋ ਗਿਆ ਹਰ ਸਤ ਸਰੂਪ ਹੋ ਗਿਆ ਹੁੰਦੇ ਹੈ ਜੇ ਕਾਹਨ ਲਿਖਿਆ ਵੀ ਸ਼ਾਰੀ ਨਾਲ ਸਤਿਆ ਸਰੂਪ ਹੋ ਗਿਆ ਹਰ ਇੱਕੋ ਵਰਤ ਹੈ ਹਰ ਇੱਕੋ ਵਰਤ ਹੈ ਇੱਕ ਹੋ ਕੇ ਵਰਤਦਾ ਹੁਣ ਤੁਫਾਨ ਹੋ ਕੇ ਨਹੀਂ ਵਰਤਦਾ ਜਿੱਥੇ ਅੱਗੇ ਬੰਨ ਅੱਡ ਹੋ ਕੇ ਵਰਤਦਾ ਸੀ ਹੁਣ ਗੋ ਅੱਡ ਨਹੀਂ ਹੋ ਕੇ ਵਰਤਦਾ ਇੱਕੋ ਵਰਤਾ ਇੱਕੋ ਉਤਪੱਤਿਆ ਇੱਕ ਇੱਕੋ ਉਤਪੱਤਿਆ ਕਦੀ ਹੋਊਗਾ ਇੱਕੋ ਹੋ ਕੇ ਹੋਊਗਾ ਹੁਣ ਹੁਣ ਅੱਧਾ ਉਤਪੱਤ ਹੋ ਸਕਦਾ ਮਾਇਆ ਨਾਲੇ ਉਤਪਤ ਹੋ ਸਕਦਾ ਜੁੜ ਕੇ ਉਸ ਇੱਕੋ ਆਇਆ ਉਗੂਗਾ ਤਾਂ ਇੱਕੋ ਹੀ ਉਗੂਗਾ ਇੱਕੋ ਹੀ ਉਤਪਤ ਹੁੰਦਾ ਇੱਕ ਤੇ ਘੱਟ ਉਤਪਤ ਨਹੀਂ ਹੁੰਦਾ ਅਬ ਕਿਉਂ ਗੁਬੇਟਾਲ ਲੈ ਚੱਲ ਨਹੀਂ ਬਦੀ ਹੁੰਦੀ ਇਹਦੇ ਕਿਉਂ ਹਰ ਨਾਮ ਧਿਆਵੈ ਤਿੰਨ ਡਰ 60 ਕੱਤਿਆ ਹਾਂ ਜਿਹੜੇ ਹਾਲਾਤ ਆਉਂਦੇ ਰਹਿੰਦੇ ਆਂ ਡਰ ਜਿਹੜਾ ਹੈਗਾ ਪਰਮੇਸ਼ਰ ਦੂਰ ਅੰਦਰ ਗੁਰਮਤੀ ਦੇਵੇ ਆਪ ਗੁਰਮੁਖੀ ਹਰ ਜਪਿਆ ਗੁਰਮਤੀ ਦੇਵੇ ਆਪ ਜਿਹਨੂੰ ਸਤਗੁਰ ਨੇ ਆਪ ਮੱਥ ਦਿੱਤੀ ਹੈ ਜਿਹੜਾ ਆਪਣੇ ਬੋਲੇ ਆਪ ਨੂੰ ਮੱਥ ਦਿੱਤੀ ਹੈ ਵਾਦੂ ਘੱਟ ਦਿੱਤੀ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ ਹਾਂ ਗੁਰਮੁਖ ਹਰ ਜਪਿਆ ਫਿਰ ਗੁਰਮੁਖ ਨੇ ਹਾਲੂ ਜਾਣਿਆ ਅਸਲ ਚ ਪਰਮੇਸ਼ਰ ਦੇ ਮੱਤੇ ਦਿੱਤੀ ਹੈ ਗੁਰਬਾਣੀ ਆ ਫੇ ਫੇ ਜਾਏ ਇੱਥੇ ਨਵੀਂ ਪੌੜੀ ਸਮਾਤੀ ਹੈ ਜੀ ਹਾਂ